ਅਤਿਤ ਉਦਾਰਣ ਪਾਰ ਬ੍ਰਹਮ ਪੁਰਖ ਅਪਾਰ ਜਿਸੈ ਉਧਾਰੇ ਨਾਨਕਾ ਸੋ ਸਿਮਰੇ ਸਿਰਜਣਹਾਰ ਪਤਿਤ ਉਦਾਰਣ ਪਾਰ ਬ੍ਰਹਮ ਪਾਰ ਬ੍ਰਹਮ ਇਹਦਾ ਪਤਿਤ ਗਿਲੇ ਨੇ ਹੋਕੋ ਛੁੱਟ ਗਿਆ ਆਇਆ ਜਿਹੜੇ ਰਲਦੇ ਪਤਿਤ ਹੋ ਗਏ ਉਲੀਪਤਾ ਆ ਗਈ ਜਿਨ੍ਹਾਂ ਦੀ ਬੁੱਧੀ ਚ ਪਰਮ ਪਰਮ ਉਹਨਾਂ ਦਾ ਉਦਾਰ ਕਰ ਦਿੰਦਾ ਪਤਿਤ ਉਦਾਰਨ ਪਰਮ ਸਮਰਥ ਪੁਰਖ ਅਪਾਰ ਉਹ ਅਪਾਰ ਪੁਰਖ ਸਮਰਥ ਹੈ ਉਦਾਰ ਕਰਨ ਦੇ ਵਿੱਚ ਉਦਾਰ ਕਰਨ ਵਿੱਚ ਪਰਮ ਪਰਮ ਪੁਰਖ ਕਰ ਦਿੰਦਾ ਉਹ ਉਹ ਫਿਰ ਕੀ ਕਰਦਾ ਸਿਰਜਣਹਾਰ ਨੂੰ ਸਮਝਦਾ ਆਪਣੇ ਦੇਖੋ ਪਾਰਬ੍ਰह्म ਨੂੰ ਨਹੀਂ ਸਮਝਦਾ ਹੈ ਪਾਰਬ੍ਰह्म ਸਿਰਜਣਹਾਰ ਨੂੰ ਨਹੀਂ ਕਰਜਣਹਾਰ ਪਾਰਬ੍ਰह्म ਨਹੀਂ ਹੈ ਸਿਰਜਣਹਾਰ ਆ ਜਿਹੜੀ ਸਰੀਰ ਸਰਜੇ ਜੀ ਕਿਨ ਹੈ ਆਪਣੇ ਜੋ ਆਤਮਾ ਬਾਹਰ ਕੀਤੀ ਉਹ ਸਿਰਜਣਹਾਰ ਆਤਮਾ ਦਾ ਸਿਰਜਣਹਾਰ ਉਹ ਤਾਂ ਮੂਰਤ ਹੈ ਆਪਣੇ ਮੂਰਤ ਦਾ ਜਿਹੜਾ ਹੈ ਉਹ ਨੂੰ ਸਮਝਦਾ ਹੋ ਦੇਖੋ ਇੱਕੋ ਨਾਨਕਾ ਜੋ ਜਲਤਲ ਰਿਹਾ ਸਮਾਇ ਜਿਹੜਾ ਜਲ ਵਿੱਚ ਸਮਾਇਆ ਹੋਇਆ ਉਹ ਤਾਂ ਫਿਰ ਮੂਰਿਆ ਸਾਡਾ ਹਾਲ ਵਿੱਚ ਸਮਾਇਆ ਹੋਇਆ ਜਲ ਸਾਡਾ ਸਮਾਏ ਤੂੰ ਤੇ ਮਰ ਜਾ ਜਿਹੜਾ ਕੰਮ ਦਾ ਮਰ ਜਾ ਜੀਵ ਹੈ ਜਿਹੜਾ ਜਲ ਕਲ ਸਮਾਇਆ ਹੋਇਆ ਮੂਰ ਹੈ ਬਾਹਰੋਂ ਬਾਹਰ ਹੈ ਕਿਉਂ ਬਾਹਰੋਂ ਆਪਣੇ ਹੁਕਮੇ ਵਿੱਚ ਆ ਸਜਣਾ ਆ ਰਿਹਾ ਤਾਂ ਸਜਣਾ ਆ ਰਿਹਾ ਆਪੇ ਰਜਾ ਆ ਰਿਹਾ ਆਪੇ ਸਜਣਾ ਆ ਰਿਹਾ ਰਚਨਹਾਰ ਦਾ ਜਿਹੜਾ ਭਾਵ ਗਾਇਨ ਦੋਹਾਂ 'ਚ ਫਰਕ ਹੈ ਸਮਝੋਣਾ ਚਾਹੀਦਾ ਹੈ ਜੀ ਹਾਂ ਅਜਾ ਹਾ ਤਜੀਬ ਹੈ ਕਾ ਮਹੱਲਾ ਤੀਜਰ ਹੈ ਸਦਾ ਸਦਾ ਸੋ ਸੇਵੀ ਹੈ ਜੋ ਸਭ ਮੈਂ ਰਹੇ ਸਮਾਏ ਅਵਰ ਦੂਜਾ ਕਿਉ ਸੇਵੀਏ ਜੰਮੈ ਤੈ ਮਰ ਜਾਏ ਇਹ ਗਲਤ ਕਰ ਹੋਵੇ ਇਹ ਰਹਿੰਦੇ ਕਿਸੇ ਯਾਦ ਹੋਏ ਨੇ ਬਹੁਤ ਪੁਰਾਣੇ ਸਦਾ ਸਦਾ ਸੋ ਸੇਵੀ ਹੈ ਜੋ ਸਭ ਮੈਂ ਰਹੇ ਸਮਾਇ ਜਿਹੜਾ ਸਾਰਿਆਂ ਸਮਾਇਆ ਹੋਇਆ ਉਹ ਇਹਦਾ ਮੂਲ ਹੈ ਜੀ ਇਹੀ ਕਹਿਣਾ ਚਾਹੁੰਦੇ ਆਂ ਸ਼ਲੋਕ ਵਿੱਚ ਪੰਜਵੇਂ ਪਾਦਸ਼ਾ ਬੇਪਤਿਤ ਉਧਾਰਨ ਪਾਰ ਬ੍ਰਹਮ ਤ ਪਤਿਤ ਉਧਾਰਨ ਹੈ ਹੈ ਜੀ ਪਤ ਤਾਂ ਇਹੀ ਹੋਇਆ ਹੋਇਆ ਹੈ ਠੀਕ ਹੈ ਜੀ ਅੱਗੇ ਆ ਕੇਲਾ ਹੀ ਬਦਲ ਜਿੱਥੇ ਕੋਈ ਅੱਖਰ ਨਹੀਂ ਇਹਨਾਂ ਨੂੰ ਲੱਭਦਾ ਉਥੇ ਟਿੱਪੀ ਲਾ ਦਿੰਨੇ ਇਹ ਇਹ ਤਾਂ ਬਹੁਤ ਬੜੀ ਭੁੱਲ ਹੈ ਸਮਰਥ ਲੱਭਦਾ ਹੈ ਸਮਰਥ ਦਾ ਕੋਈ ਲੱਭਦੇ ਨਹੀਂ ਹੈਗਾ ਸਮਰੰਥ ਤਾਂ ਹੁੰਦਾ ਹੀ ਨਹੀਂ ਹਾਂਜੀ ਔਂਕਰ ਨਾਲ ਵੀ ਆਉਂਦਾ ਪੰਜ ਵਾਰ ਔਂਕਰ ਨਾਲ ਪਰ ਆਪਾਂ ਦੇਖੀਏ ਸਮਰਥ ਵੀ ਹੈਗਾ ਸਮਰਥ ਦਾ ਕਈ ਵਾਰ ਹੈ ਲਿਖਿਆ ਹੈ ਰਾਮ ਤੋਂ ਪਹਿਲਾਂ ਆਪਾਂ ਭਾਸ਼ਾ ਸਮਰਥਾ ਉਹ ਤਾਂ ਸ ਸ ਮ ਮ ਰ ਰ ਠ ਠਾ ਲਿਖਿਆ ਹੋਇਆ ਜੀ ਉਹ ਪੂਰਾ ਅੱਛਾ ਜੀ ਉਹ ਬਹੁਤ ਵਾਰ ਆਉਂਦਾ ਜਿਹੜਾ ਸਮਰਥ ਅੱਖਰ ਹੈ ਉਹਦਾ ਮੂਲ ਰੂਪ ਜਿਹੜਾ ਹੈਗਾ ਸ ਸ ਮ ਮ ਰ ਰ ਤੇ ਠ ਹੈ ਕੁਝ ਜਗ੍ਹਾ ਪੈਰ 'ਚ ਰ ਪਾ ਕੇ ਉੱਪਰ ਟਿੱਪੀ ਲਾਤੀ ਸ ਸ ਦੇ ਉਹ ਤਾਂ ਫਿਰ ਸਮਰੰਥ ਬਣ ਜਾਂਦਾ ਜਮਰਾਤੀ ਜਿਹੜਾ ਪਾ ਸਕਦੇ ਆ ਟਿੱਪੀ ਦੀ ਲਾ ਸਕਦੇ ਹਾਂਜੀ ਟਿੱਪੀ ਗਲਤ ਲਾਈ ਮਸਾਕੇ ਟਿੱਪੀ ਨਹੀਂ ਹੋਣੀ ਜੇ ਇਹ ਆਦ ਕਾ ਆਦ ਕਦੀ ਟਿੱਪੀ ਬਣਾਤੀ ਆਦ ਕਬ ਨਹੀਂ ਸੀ ਲੱਗਦਾ ਆਦ ਕਾ ਲੱਗਣਾ ਮਤਲਬ ਜਾਇ ਜਾਇ ਲਾਉਣਾ ਹਾਂਜੀ ਸੱਚ ਜਿਸ ਹੋ ਰਿਹਾ ਨਾ ਸੱਚ ਇਹ ਠੀਕ ਹੈ ਜੀ ਹੱਥ ਦਾ ਪਰ ਟਿੱਪੀ ਦਾ ਲੱਗੇ ਨਹੀਂ ਲੱਗਦੀ ਉਹਦਾ ਆਦ ਤੋਂ ਜਦ ਨੇ ਆਦ ਕ ਹੋਵੇ ਹੱਥ ਵੀਰ ਚੋਨੇ ਗਲਤੀ ਨਾਲ ਟਿੱਪੀ ਬਣਾਤੀ ਹੋਵੇ ਹੋ ਸਕਦਾ ਦੀ ਕਾਪੀ ਕਰਦੇ ਸੀ ਨਾ ਪਰ ਕਿਤੇ ਪੜਾ ਕੀ ਹੋਵੇ ਕੋਈ ਸਹੀ ਜੁੜ ਗਈ ਹੋਵੇ ਪਤਾ ਨਹੀਂ ਕਿਵੇਂ ਹੋਇਆ ਗਲਤੀ ਹੋਈ ਹੋਈ ਜੇ ਗਲਤੀ ਹੋ ਗਈ ਤਾਂ ਉਹ ਗਲਤੀ ਅਸੀਂ ਚਾਹੇ ਛਿੱਟੀ ਕਾਤੇ ਹੋਵੇ ਗਲਤੀ ਅਡੋਰੀ ਗੱਲਾਂ ਨੇ ਸਾਰੀਆਂ ਉਥੇ ਜਿਹੜੀ ਉਹ ਨੇ ਪਿੱਛੇ ਉਹ ਜੱਡ ਸੀ ਠੀਕ ਹੈ ਜੀ ਜਿਸੇ ਉਧਾਰੇ ਨਾਨਕਾ ਸੋ ਸਿਮਰੇ ਪਹਿਲਾਂ ਸਿਰਜਣਹਾਰ ਨੂੰ ਸਿਮਰਨਾ ਹਾਂ ਤੇ ਉਸ ਤੋਂ ਬਾਦ ਪਰਮ ਬ੍ਰਹਮ ਤੱਕ ਹੈ ਜੀ ਹਾਂ ਜੀ ਹਾਂ ਠੀਕ ਹੈ ਅੱਗੇ ਪਿੱਛੇ ਚਾਹੇ ਪਤ ਉਦਾਹਰਣ ਹੈ ਪਰ ਪਹਿਲਾਂ ਸਿਰਜਣਹਾਰ ਨੂੰ ਪਰਮਾਤਮਾ ਦਾ ਜਿਹੜਾ ਬਲਾਪ ਥੇ ਹੈ ਇਹ ਉਹ ਤੋਂ ਉਲਟ ਗੱਲ ਕਹੀ ਗਈ ਹੈ ਪਰਮਾਤਮਾ ਦੀ ਆਪਣਾ ਜਿਹੜਾ ਸਿਰਜਣਹਾਰ ਹੈ ਪ੍ਰਾਤਮਾ ਹੈ ਉਹ ਆਪਣਾ ਹੀ ਬੂੜਾ ਹੋ ਉਹ ਸਿਰਜਣਹਾਰ ਹੈ ਅੱਧਾ ਸਿਰਜਣਹਾਰ ਹੈ ਤਾਹੇ ਸਿਰਜਣਹਾਰ ਹੈ ਠੀਕ ਹੈ ਜੀ ਜਿਹੜਾ ਅੱਧਾ ਹੈ ਉਹ ਆਪਣੇ ਤੋਂ ਅੱਧਾ ਅਡ ਕੇ ਆਪਣੇ ਧਿਆਨ ਨੂੰ ਜੋੜਦਾ ਮਾਇਆ 'ਚ ਆਪ ਨਹੀਂ ਜੁੜਦਾ ਜਿਹੜਾ ਨਹੀਂ ਜੁੜਦਾ ਜੋੜਦਾ ਧਿਆਨ ਨੂੰ ਉਹ ਸਿਰਜਣਹਾਰ ਹੈ ਜਿਹੜਾ ਜੁੜਦਾ ਉਹ ਸਿਰਜਣਹਾਰ ਹੈ ਉਹਨਾਂ ਇਸ ਤਰ੍ਹਾਂ ਧਿਆਨ ਰੱਖਣਹਾਰ ਹੈ ਜਿਹਦਾ ਧਿਆਨ ਹੈ ਉਹ ਸਿਰਜਣਹਾਰ ਠੀਕ ਹੈ ਪਰ ਪਹਿਲਾਂ ਤਾਂ ਸਿਰਜਣਹਾਰ ਨੂੰ ਸਿਮਰਨਾ ਹੈ ਉਸ ਤੋਂ ਬਾਦ ਫਿਰ ਪਾਰਬਰਮ ਤਕ ਪਹੁੰਚਣਾ ਹੈ ਜੀ ਆਪ ਤਾਂ ਵੱਡੇ ਨੂੰ ਹੀ ਸੇਵੀਦਾ ਹੁੰਦਾ ਹੈ ਪਹਿਲਾਂ ਸਿਰਜਣਹਾਰ ਹੈ ਪਿਆਰੇ ਖੜਾ ਉਹ ਸਿਰਜਣਹਾਰ ਨੇ ਪਾਰਵਰਮ ਤੱਕ ਜਾਣਾ ਹੈ ਠੀਕ ਹੈ ਜੀ ਆਪਾਂ ਗੁਰ ਕੇ ਪਾਣੀ ਜਾਂਦੇ ਰਹੇਗਾ ਆਪਣਾ ਪਾਣੀ ਛੱਡ ਕੇ ਹਾਂ ਸਿਰਜਣਹਾਰ ਦਾ ਪਾਸ ਉਹ ਲੈ ਕੇ ਜਾਊਗਾ ਠੀਕ ਹੈ ਜੀ ਇੱਥੇ 15 ਨੰਬਰ ਸ਼ਲੋਕ ਲਈ ਸਮਾਪਤੀ ਹੈ ਜੀ ਹਾਂ